ਲੋਕ ਮਚ ਰਾਜ ਸੁਖ ਮਿਸਤੰਗ ਮਚ ਭੋਗ ਰਸ ਮਿਸਤੰਗ ਮਚ ਮਿਸਤੰਗ ਸੁਖ ਮਾਇਆ ਮਿਸਤੰਗ ਸਾਧ ਸੰਗੀ ਹਰ ਨਾਨਕ ਦਾਸ ਮਿਸਤੰਗ ਪ੍ਰਭ ਦਰਸ਼ਨ ਇਹ ਮਿੱਠਾ ਕੀ ਲੱਗਦਾ ਹੈ ਦੇਖੋ ਗੁਰਮਖਾਂ ਨੂੰ ਮਿੱਠਾ ਕੁਝ ਹੋਰ ਲੱਗਦਾ ਸੰਸਾਰ ਨੂੰ ਮਿੱਠਾ ਕੁਝ ਹੋਰ ਲੱਗਦਾ ਮਿੱਠਾ ਗੁਰਮਖਾਂ ਨੂੰ ਕੀ ਲੱਗਦਾ ਸਾਨੂੰ ਕਿ ਮਿੱਠਾ ਲੱਗਦਾ ਮਿੱਠਾ ਹੁੰਦਾ ਕੀ ਹੈ ਨਹੀਂ ਆ ਰਾਜ ਸੁਖ ਮਿੱਠਾ ਲੱਗਦਾ ਸੰਤਾਂ ਨੂੰ ਗੁਰਮਖਾਂ ਨੂੰ ਗੁਰਸਿੱਖਾਂ ਨੂੰ ਰਾਜ ਮੱਠਾ ਰਾਜ ਦਾ ਸੁਖ ਨਹੀਂ ਮਿੱਠਾ ਲੱਗਣਾ ਚਾਹੀਦਾ ਸਿੱਖ ਨੂੰ ਜੇ ਸਿੱਖ ਨੂੰ ਰਾਜ ਮਿੱਠਾ ਲੱਗਦਾ ਉਹ ਸਿੱਖ ਨਹੀਂ ਹੈ ਸਿੱਖੀ ਛੱਡ ਦੂਗਾ ਉਹ ਜਦ ਤੋਂ ਰਾਜ ਮਿੱਠਾ ਮੰਨ ਲਿਆ ਰਾਜ ਕਰੇਗਾ ਖਾਲਸਾ ਮੰਨ ਲਿਆ ਸਿੱਖੀ ਛੁੱਟ ਗਈ ਨਾ ਰਾਜ ਸੁਖ ਮਿੱਠਾ ਨਹੀਂ ਹੈ ਰਾਜ ਦਾ ਸੁਖ ਮੱਠਾ ਮੱਤ ਪੋਗ ਰਸ ਮਿੱਠਾ ਆਪੋ ਹੋਗ ਰਸ ਵੀ ਮਿੱਠੇ ਨਹੀਂ ਹੈ ਇਹਨਾਂ ਦੋਹਾਂ 'ਚ ਫਸਿਆ ਹੋਇਆ ਸੀ ਇਹਨਾਂ ਦੇ ਜੋ ਸੰਸਾਰ ਫਸਿਆ ਹੋਇਆ ਇੱਥੇ ਹੀ ਰਣਜੀਤ ਸਿੰਘ ਫਸਿਆ ਹੋਇਆ ਆ ਦੋਨਾਂ ਦੇ ਵਿੱਚ ਹੀ ਫਸਿਆ ਹੋਇਆ ਫਿਰ ਤੇ ਫਿਰ ਕਿੱਥੇ ਸੀ ਕਿ ਕਿਤਾ ਹਜ਼ਾਰਾਂ ਕਹਾ ਦੂਰ ਬੈਠੇ ਨੇ ਲੋਕ ਮਾ ਤਿੰਨੇ ਇੱਕ ਪੰਤੀ ਆ ਉੱਪਰ ਲੈ ਲੀਏ ਸਿਰਫ ਇਹ ਇੱਕੋ ਪਤਾ ਲੱਗਦਾ ਅੱਜ ਸਿੱਖ ਸਾਰੇ ਸੰਸਾਰੀ ਨੇ ਤੇ ਭਗਤਾਂ ਦੇ ਸੰਸਾਰੀਆਂ ਜੋੜ ਕੇ ਦੇਣਾ ਗੁਰਬਾਣੀ ਚੰਗੀ ਸਿੱਖ ਦਾ ਸੰਸਾਰ ਦਾ ਜੋਰ ਨਹੀਂ ਆ ਸਕਦਾ ਮਾਇਆ ਦੇ ਸੁੱਖ ਨਹੀਂ ਮਿੱਠੇ ਤੇ ਮਾਇਆ ਦੇ ਸੁੱਖ ਮਿੱਠੇ ਲੱਗਦੇ ਨੇ ਸਿੱਖੀ ਤੋਂ ਕਿੰਨਾ ਦੂਰ ਲੱਖਾਂ ਗੁਣ ਸੰਗਤ ਮਿੱਠੀ ਲੱਗਦੀ ਹੈ ਜੇ ਲਗੇ ਜੇ ਅੰਤਰਾ ਆਤਮਾ ਆਪਣੇ ਮੂਲ ਨਾਲ ਜੁੜਿਆ ਹੋਇਆ ਰਹੇ ਆਪਣੇ ਮੂਲ ਨਾਲ ਇੱਕ ਹੋਣਾ ਮਿੱਠਾ ਲੱਗੇ ਹਰ ਨਾਨਕ ਦਾਸ ਵੇਖੰ ਪ੍ਰਭ ਦਰਸ਼ਨ ਨੂੰ ਯਾਤਕ ਜਿਹੜਾ ਉਹਦਾ ਦਾਸ ਹੈ ਪ੍ਰਭ ਦਾ ਦਰਸ਼ਨ ਮਿੱਠਾ ਲੱਗਦਾ ਹੈ ਆਤਮ ਦਰਸ਼ਨ ਮਿੱਠਾ ਲੱਗਦਾ ਹੈ ਅਰ ਸਾਧ ਦੀ ਸੰਗਤ ਦਰਸ਼ਨ ਮਿੱਠਾ ਲੱਗਦਾ ਲਗੜਾ ਸੋਨੇ ਮਨ ਮਜਾ ਹੂੰ ਰਤਿਆਂ ਵਿਦੜੋ ਸਤ ਖੋਕ ਨਾਨਕ ਮਠੜਾ ਲਗੜਾ ਸੋ ਨਿਉ ਮਨ ਮਜਾਹੂ ਰਤੇ ਜਿਨ੍ਹਾਂ ਨੂੰ ਮਨ ਦੇ ਅੰਦਰ ਦਾ ਰੰਗ ਚੜ ਗਿਆ ਔਰ ਮਨ ਦੇ ਅੰਦਰ ਮਨ ਮੈਂ ਆਪ ਆਇਆ ਹੋ ਉਹਦੇ ਨਾਲ ਨਿਉ ਲੱਗ ਜਵੇ ਜਿਹੜਾ ਮਨ ਦੇ ਵਿੱਚ ਹੈ ਉਹਦੇ ਨਾਲ ਨਿਉ ਲੱਗ ਜਵੇ ਤਾਂ ਫਿਰ ਮੁੰਦੇ ਅੰਦਰ ਹੀ ਝੱਕ ਫਿਰ ਅੰਤਰਮੁਖੀ ਹੀ ਰਹਿੰਦੇ ਨੇ ਉਹ ਆਪਾਂ ਵਾਲੇ ਦੇ ਵਿੱਚ ਹੀ ਸਰਸੀਮਾ ਕਰਕੇ ਦੇਖਦੇ ਰਹਿੰਦੇ ਨੇ ਬਾਹਰ ਫਿਰ ਕੁਟੀ ਨਾਲ ਉਹਨਾਂ ਦਾ ਮੇਲ ਹੀ ਨਹੀਂ ਰਹਿੰਦਾ ਫਿਰ ਸੰਸਾਰ ਦੇ ਵਿੱਚ ਉਹਨਾਂ ਨੂੰ ਕੁਝ ਲੈਣ ਦੇਣ ਨੂੰ ਰਹਿੰਦਾ ਹੀ ਨਹੀਂ ਬਿਦਲੋ ਸੱਚ ਧੋਖ ਸਾਰਾ ਹੀ ਸੱਚ ਸਾਰੇ ਹੀ ਧੋਖ ਸਾਰੀਆਂ ਹੀ ਲੋੜਾਂਾਂ ਦੀਆਂ ਸੱਚ ਨਾਲੇ ਪੂਰੀਆਂ ਹੋ ਜਾਂਦੀਆਂ ਨੇ ਉਹਨਾਂ ਦਾ ਹੋਰ ਕੋਈ ਪਿੱਛਾ ਰਹਿੰਦੀ ਹੋਈ ਨਹੀਂ ਸਭੇ ਧੋਖ ਸਾਰੇ ਹੀ ਪ੍ਰਾਪਤ ਸੱਚ ਜੋ ਹੋ ਜਾਂਦੇ ਨੇ ਆਪਣੇ ਮੂਰਤ ਜੋ ਹੋ ਜਾਂਦੇ ਨੇ ਨਾਨਕ ਮਛਲਾ ਸੋਚਣ ਉਹ ਜਿਹੜਾ ਕਵੀ ਹੁੰਦਾ ਜਿਹੜਾ ਉਹ ਗਿਆਨਵਾਨ ਆਦਮੀ ਹੁੰਦਾ ਉਹਦੇ ਬੋਲ ਮਿੱਠੇ ਹੁੰਦੇ ਨੇ ਫਿਰ ਮਿੱਠੀ ਬਾਣੀ ਬੋਲਦਾ ਫਿਰ ਗੁਰਬਾਣੀ ਬੋਲਦਾ ਹੈ ਉਹ ਤੜੀ ਮਿੱਠਾ ਹੁੰਦਾ ਉਹ ਧਨਵਾਨ ਉਹ ਗਿਆਨਵਾਨ ਮਿੱਠਾ ਹੁੰਦਾ ਇਹ ਬੋਲਣਾ ਜੀ ਹਰ ਸੱਜਣ ਰੌਮੇ ਹੋ ਰਾ ਉਹ ਕੋ ਮਿੱਠਾ ਆਨ ਸਵਾਦ ਸਭ ਫੀਕੇ ਕਰ ਨਿਰਣੋ ਦੀ ਹਾਂ ਸਮਾਪ ਕਰ ਦਿੱਤੇ ਦੋਇ ਸ਼ਲੋਕ ਪੌੜੀ ਦੇ ਵਿੱਚ ਹਰਬਿੰ ਕਛੂ ਨਾਲ ਲੱਗਈ ਭਗਤਨ ਕੋ ਮਿੱਠਾ ਗੁਰਮਖਾਣੂ ਗੁਰਸਖਾਣੂ ਹਰ ਤੋ ਬਿਨਾ ਆਪਣੇ ਮੂਤੋ ਬਿਨਾ ਕੁਛ ਵੀ ਮਠਾ ਨਹੀਂ ਲੱਗਦਾ ਆਨ ਸਵਾਦ ਸਭ ਫਿੱਕੇ ਆ ਕਰਦੇ ਉਹਨਾਂ ਨੇ ਨਿਰਣਾ ਕਰ ਲਿਆ ਕਿ ਹੋਰ ਜਿੰਨੇ ਸਵਾਦ ਨੇ ਮਾਇਆ ਦੇ ਸਭ ਹਾਂ ਕੋੜੇ ਔਰ ਫਿੱਕੇ ਚ ਫਰਕ ਦਾ ਸੱਚ ਵੀ ਫਿੱਕਾ ਲੱਗਦਾ ਸੰਸਾਰ ਦਾ ਗਿਆਨ ਗਿਆਨ ਵੀ ਫਿੱਕਾ ਲੱਗਦਾ ਜਿਵੇਂ ਸਾਇੰਸ ਸਾਇੰਸ ਗਿਆਨ ਨਾਲ ਜੋ ਵੀ ਗਿਆਨ ਹੈ ਸੰਸਾਰ ਦਾ ਮਾਇਆ ਦਾ ਜੋ ਵੀ ਗਿਆਨ ਮਾਇਆ ਦਾ ਜੋ ਵੀ ਗਿਆਨ ਹੈ ਰੀਅਲ ਗਿਆਨ ਹੈ ਜੋ ਮਾਇਆ ਦਾ ਉਹ ਦਾ ਕੂੜ ਕਪੜ ਦਾ ਗਿਆਨ ਬਸੀਠਾ ਚਰਨ ਕਮਨ ਮਨ ਬੇਦਿਆ ਜਿਉ ਰੰਗ ਮਜੀਠਾ ਅ ਭਰਮ ਦੁੱਖ ਕਟਿਆ ਅ ਗਿਆਨਤਾ ਹੈ ਇਹੀ ਭਰਮ ਇਹਦਾ ਦੁੱਖ ਜਿਹੜਾ ਸੀ ਕੱਟਿਆ ਗਿਆ ਤੇ ਵਿੱਚ ਦੁੱਖੇ ਦੁੱਖੋਂ ਧਰਮ ਦੇ ਵਿੱਚ ਆ ਗਿਆ ਗੁਰਪਹਿਬ ਸਿਠਾ ਜਿਹੜਾ ਗਿਆਨ ਲਿਆ ਹੋਇਆ ਗਿਆਨ ਨਾਲੇ ਧਰਮ ਦਾ ਨਾਸ ਹੋਣਾ ਗੁਰਪ੍ਰਸਾਦ ਧਰਮ ਦਾ ਕਮਲ ਮਨ ਵੇਚਿਆ ਜੋ ਰੰਗ ਵਜੀਠਾ ਚਲਨ ਕਮਲ ਦੇ ਨਾਲ ਇਸ ਤਰੀਕੇ ਨਾਲ ਜੁੜ ਆਪਣੇ ਮੂਲ ਮਨ ਇਸ ਤਰੀਕੇ ਨਾਲ ਜੁੜ ਗਿਆ ਜੇ ਮੈਂ ਕੱਪੜੇ ਨੂੰ ਬਹੁਤ ਪੱਕਾ ਰੰਗ ਚੜ੍ਹੀ ਦੀਦਾ ਕੱਪੜ ਨਹੀਂ ਦੀਦਾ ਰੰਗੇ ਰੰਗਦੀਦਾ ਹਾਂ ਕਪੜਾ ਰੰਗ ਕੋਈ ਹੋ ਜਾਂਦਾ ਸਿਰ ਦੋ ਨਹੀਂ ਜਾਂਦੇ ਰੋ ਇੰਨਾ ਮੰਨੋ ਰੰਗ ਚੜ੍ਹ ਪ੍ਰਭੂ ਬਿਨ ਸਭ ਝੂਠਾ ਜਿਉ ਪ੍ਰਾਣ ਤਨ ਮਨ ਪ੍ਰਭੂ ਹੋ ਜਿਉ ਪ੍ਰਾਣ ਤਾંગੋਂ ਮਨ ਸਭ ਪ੍ਰਭੂ ਹੀ ਪ੍ਰਭੂ ਹਾਂ ਇਹ ਸਾਰੇ ਉਹ ਚ ਜੀਵ ਵੀ ਸਮਾ ਗਿਆ ਤਨਮਨ ਵੀ ਸਮਾ ਗਿਆ ਪ੍ਰਾਣ ਵੀ ਸਾਰਾ ਪ੍ਰਭੂ ਹੀ ਰਹਿ ਗਿਆ ਬਾਕੀ ਉਹ ਤੇ ਸਮਾ ਗਿਆ ਜਿਵੇਂ ਗੰਗਾ ਕੇ ਸੰਗ ਸਲਤਾ ਵਿਗੜੀ ਗੰਗਾ ਦੇ ਵਿੱਚ ਛੋਟੀ ਨਦੀ ਸਮਾ ਜਾ ਕੇ ਗੰਗਾ ਰਹੇਗੀ ਨਦੀ ਦਾ ਨੋਂ ਖਤਮ ਹੋ ਗਿਆ ਜੀਵ ਦਾ ਖਤਮ ਹੋ ਗਿਆ ਜੀਵ ਦੇ ਪ੍ਰਾਣ ਖਤਮ ਜੀਵ ਦਾ ਤਨਮਨ ਖਤਮ ਪ੍ਰਭੂ ਰਹਿ ਗਿਆ ਉਹ ਸਰਤਾ ਗੰਗਾ ਹੋਏ ਨਿਬੜੀ ਗੰਗਾ ਹੀ ਰਹੀ ਉਹ ਨਦੀ ਵਿੱਚੇ ਸਮਾ ਗਈ ਸਭ ਠੂਠਾ ਜੋ ਠੂਠਾ ਬਣ ਰਹੀ ਆ ਉਹ ਨਹੀਂ ਰਿਹਾ ਉਹ ਮਨਤ ਗਿਆ 100 ਬਣ ਗਿਆ ਆਪਣਾ ਤੋਂ 100 ਰਹਿ ਗਿਆ ਪੱਤ ਸ਼ੁਰੂ ਹੋ ਦੇ ਪ੍ਰੋਗਰਾਮ ਦਾ ਵਿਚਾਰ ਸਮਝੋ ਠੀਕ ਹੈ ਜੀ ਇਹ 12ਵੀਂ ਪੌੜੀ ਦੀ ਸਮਾਪਤੀ ਹੈ ਜੀ